ਸੋ ਅੰਦਰ ਸੋ ਬਾਹਰ ਅਨੰਤ ਘਟ ਘੜ ਵਿਆਪ ਰਿਹਾ ਭਗਵੰਤ ਸੋ ਅੰਦਰ ਸੋ ਬਾਹਰ ਅਨੰਤ ਜਿਹੜਾ ਨਾ ਨਾਮ ਹੈ ਜੋ ਹੁਕਮ ਉਹੀ ਦਾ ਅੰਦਰ ਹੈ ਉਹੀ ਬਾਹਰ ਵਰਤ ਰਿਹਾ ਜੋ ਅੰਦਰ ਤੈਨੂੰ ਸੁਣ ਲਿਆ ਉਹੀ ਬਾਹਰ ਵਰਤ ਰਿਹਾ ਦਸ ਹੋਰ ਕੀ ਕਰੂ ਜੋ ਬੋਲਦਾ ਨਾ ਉਹੀ ਬੋਲ ਰਿਹਾ ਜੋ ਬੋਲ ਰਿਹਾ ਉਹੀ ਵਰਤ ਰਿਹਾ ਬਾਹਰ ਤਾਂ ਇਹ ਕਹਿੰਦਾ जिसका कहया दरगा चलला जिसका कहया दरगाह चलला जो दरगाह चलला हुई तो कह रहे जे कहया हुई दरगाह चल रहे हैं वही है। बत रहे वही बत रहे हैं असल में एक ट्यून के कहोगे ट्यून में ਇਹਨਾਂ ਦੇ ਅਰੋਹ ਦੀ ਹੁਕਮ ਨਾਲ ਚੁਰ ਨੋਈਦੀ ਤੇ ਉਹਦੀ ਨੂੰ ਇਹਨੂੰ ਸੁਣ ਰਿਹਾ ਹੋਰ ਕਿਸੇ ਨੂੰ ਨਹੀਂ ਸੁਣਨਾ ਇਹ ਉਹਦੀ ਸਮਝ ਲੱਗ ਰਹੀ ਹੈ ਹੋਰ ਕਿਸੇ ਨੂੰ ਨਹੀਂ ਲੱਗ ਰਹੀ ਇਹਨੇ ਬਾਹਰ ਅਨੰਤ ਘਟ ਘਟ ਵਿਆਪ ਰਿਹਾ ਭਗਵਾਨ ਸੋ ਅੰਦਰ ਸੋ ਬਾਹਰ ਅਨੰਤ ਉਹਦੇ ਇੱਧਰ ਜੋ ਹੁਕਮ ਚੱਲ ਰਿਹਾ ਉਹੀ ਤਾਂ ਬੱਪਰ ਹੈ ਉਹੀ ਕੁਦਰਤ ਦੇ ਵਿੱਚ ਬੱਪਰ ਜਿਹੜਾ ਹੁਕਮ ਰਿਹਾ ਉਹ ਉਹਦੇ ਅੰਦਰ ਚੁਰ ਰਿਹਾ ਨੂੰ ਤੋ ਬਾਹਰ ਹਲਤ ਘਟ ਘਟ ਪਿਆ ਪਰਿਆ ਭਗਵੰਤ Allah ਸਾਰਿਆਂ ਦੇ ਵਿੱਚ ਹੀ ਹੈ ਘਟਟੜ ਦੇ ਵਿੱਚ ਦੇਹ ਦੇ ਵਿੱਚ ਪਰ ਕਿਉਂ ਨਹੀਂ ਸਟੇਸ਼ਨ ਚਾਹੀਦਾ ਸੀ ਚਾਲੂ ਉਹ ਸਟੇਸ਼ਨ ਜਿਹਦਾ ਉਹ ਸਟੇਸ਼ਨ ਲੱਗਿਆ ਥਾ ਮਤਲਬ ਸਾਡੇ ਰੇਡੀਓ ਚ ਉਹ ਤਾਂ ਉਹਦੀ ਗੱਲ ਸੁਣੂ ਜਿਹੜਾ ਸਪੈਸ਼ਲ ਹੋਰ ਲੱਗਿਆ ਨੂੰਰਦੂ ਉਹ ਸਟੇਸ਼ਨ ਲੱਭ ਜੁਆ ਜਿਹਨੂੰ ਉਹ ਇਹ ਜਿਹੜੂ ਬੋਜਾਤੀ ਹੈ ਜਿਹੜਾ ਕੋਈ ਹੋਰ ਨਹੀਂ ਬੈਠਾ ਉਹ ਆਪਣਾ ਹੋਰ ਨਹੀਂ ਬੈਠਾ ਆਪਣੇ ਆਪਣੇ ਮਰਜ਼ੀ ਦੇ ਲਾਇਆ ਨੇ ਸਟੇਸ਼ਨ ਟੋਕਾ ਜਿਹਦਾ ਸਟੇਸ਼ਨ ਠੀਕ ਲੱਗ ਗਿਆ ਪਤਾ ਵੀ ਇਹਨਾਂ ਨੂੰ پتہ ਹੁੰਦਾ ਹੈ ਇੱਥੇ ਕੌਣ ਦਾ ਬੜ ਗਿਆ ਬੋਦੀ ਫਿਰ ਉਹ ਨੂੰ ਹੋਈਆ ਸੋਨਾਂ ਕੇੰਦਰੀਏ ਗੱਲ ਤੂੰ ਜਾਣੂ ਲੋ ਜਾਣ ਨੂੰ ਹੋਰੇ ਸੁਣਦਾ ਹਾਂਜੀ ਧਰਨ ਬਾਹਰ ਆਕਾਸ਼ ਪਿਆਲ ਸਰਬ ਲੋਕ ਪੂਰਨ ਪਿਰਤ ਧਰਨ ਹੈ ਤਦ ਕੀ ਹੁੰਦਾ ਆਕਾਸ਼ਰ ਅੰਦਰ ਇਹ ਹੁਣ ਆਕਾਸ਼ ਪਤਾਲ ਧਰਨ ਹੈ ਹੈ ਸਰਬ ਲੋਕ ਪੂਰਨ ਪਿਰਤ ਪਾਲ ਪਿਆਲ ਵਿੱਚ ਇਹ ਅਸਲ ਚ ਪਿਆਰ ਆਲਾ ਅਰ ਅਗਾਜ਼ ਹੀ ਪਿਆਰ ਅਕਾਸ਼ ਪਿਆਰ ਅਸਲ ਜਮਾਨਾ ਚ ਦਾਦਾ ਅਸਤ ਅਕਾਸ਼ ਤਾਂ ਬਦੇ ਅਕਾਸ਼ ਦਾ ਅਗਾਜ਼ ਹੀ ਮਾਰਨ ਵਾਲਾ ਉੜਦੋਲਾ ਤੇ ਕਦਾ ਪਾ ਛੋੜਦਾ ਹੈ ਕਿ ਪਿਆਰ ਸਭ ਕੁ ਪੀ ਲੈਦਾ ਜਿਹੜਾ ਉਹ ਕੋ ਥਾਂ ਤੇ ਗਿਆ ਹਾ ਤਰਮਾਨ ਆ ਕਾਜ ਪਿਆਲ ਸਰਬ ਲੋਕ ਪੂਰਬੇ ਤਬਾਹ ਇਹ ਚਿਤਰਮਾਨਾ ਦੋਏ ਇਕੱਠੇ ਦਰੇਰੇ ਹੁਣੇ ਬਾਦੀਏ ਕਿਤੇ ਦਰੇਰੇ ਜੀ ਨੀ ਪੁੱਛ ਕੇ ਅਕਾਸ਼ ਪਿਆਲੇ ਤਰਮਾਨ ਉਦਰੇ ਨੇ ਜਿਹਾ ਹਾਲ ਹੈ ਹਾਂ ਜਿਹਾ ਇਹ ਤੁਹਾਡੇ ਅਕਾਸ਼ ਪਿਆਲ ਚਿਤਰਮਨ ਵਿਚੇ ਨੇ ਜਦੋਂ ਇਹ ਰਣਕਈਤਾ ਹੋਏ ਨੇ ਇਕੱਠੇ ਇੱਕ ਪੂਰਨ ਬ੍ਰह्म ਪੂਰਨ ਬ੍ਰह्म ਦੀ ਇਹਨੀ ਅਵਸਥਾ ਆਕਾਸ਼ ਪਿਆਰ ਹੁੰਦਾ ਕੋਈ ਚੋ ਕੇ ਆਕਾਸ਼ ਨਹੀਂ ਨੰਦਾ ਫਿਰ ਜਦ ਗਗਨ ਵੱਡ ਜਾਂਦਾ ਆਕਾਸ਼ ਪਿਆਰ ਨਹੀਂ ਨੰਦਾ ਫਿਰ ਗਗਨ ਤੋਂ ਬਾਅਦ ਤਮੰਗ ਆਕਾਸ਼ ਪਿਆਰ ਉਹ ਨਾ ਜਨਨ ਚ ਨਾ ਬਾਇਆ ਦੀ ਹੁੰਦੀ ਨਾ ਆਕਾਸ਼ ਪਿਆਰ ਦੀ ਮੈਂ ਹੁੰਦੀ ਜਿਵੇਂ ਆਪਾਂ ਇੱਕ ਫੁੱਟਬਾਲ ਦੇ ਵਿੱਚ ਬਹੁਤ ਵੱਡੀ ਫੁੱਟਬਾਲ ਸਾਡੇ ਕੋਲ ਫੁੱਟਬਾਲ आकार ਦਾ कोई बहुत ਵੱਡਾ ਸਾਡਾ ਮਕਾਨ ਉਹ ਜਗਾਹ ਆਕਾਸ਼ ਬਿਲਡਿੰਗ ਸੀ ਉਹ ਗਵਰਨਰ ਦਾ ਅਟਾਸ਼ ਬਿਲਡਿੰਗ ਵੀ ਬੰਦੇ ਹੁੰਦੇ ਸਾਡੇ ਉੱਤੇ ਸਾਡੇ ਸੱਜੇ ਨੂੰ ਆਕਾਸ਼ ਹੈ ਪਰ ਜਗਾ ਧਰਤੀ ਕੋ ਉਦੀ ਹੈ ਜਿੱਦੋਂ ਪੈਰ ਨੂੰ ਤਾਂ ਸਰੋਜੰਨਾ ਆਕਾਸ਼タル ਕੀ ਐਨਾ ਬੰਦੀ ਹੋਈ ਗੱਲਾਂ ਨੇ ਆਕਾਸ਼タル ਕੁਝ ਨਹੀਂ ਪੂਰਬ ਪੱਛਮ ਕੁਝ ਨਹੀਂ ਆ ਬੁੱਢੇ ਹੁੰਦੇ ਸਾਡੇ ਮੈਂ ਦੱਸਿਆ ਪਛਮ ਕਹਦਾ ਦਿੰਦੇ ਆ ਕਾ ਸਾਡੇ ਪਛਮਦਾ ਉਹਨਾਂ ਦੇ ਪਛਮਦਾ ਹੋਰਦਾ ਉਹ ਕਹਿੰਦੇ ਸਾਡੇ ਪਛਮ ਜਾ ਆ ਉਹਨਾਂ ਦੇ ਪਛਮਦਾ ਉਹ ਪਾਲੇ ਘਰ ਆਲੇ ਕਹਿੰਦੇ ਸਾਡੇ ਝੜਦੇ ਜਾ ਪਾਲੇ ਘਰ ਆ ਰਹੇ ਉਹ ਘਰ ਝੜਦੇ ਜਾ ਸਾਡੇ ਪਛਮ ਜਾ ਉਹ ਪਛਮ ਕੇ ਜਾਂਦੇ ਜਾ ਦੱਸੋ ਹੋ ਉਹ ਜਾੜੇ ਦਾ ਰਹਿਕ ਉਹ ਕਹਿੰਦੇ ਝੜਦਾ ਜਾ ਅਸੀਂ ਕਹਿੰਦੇ ਪਛਮ ਜਾ ਜੋ ਚੱਲਦਾ ਜੋ ਹੈ ਉਹ ਪਛਮ ਚੋਇਆ। ਨਾ ਕੋ ਚੜਦਾ ਨਾ ਕੋ ਪਛਮ। ਨਾ ਕੋ ਕਾਸ਼ਾ ਨਾ ਪਿਆਲਾ ਵੀ ਰੱਖੇ ਜੀ ਲੋਕ ਸਾਡੇ। ਹਾਂਜੀ। ਧਰਨ ਵਾਹਿਆ ਆਕਾਸ਼ ਪਿਆਲ ਲੋਕ ਸਰਬ ਲੋਕ ਪੂਰਨ ਪ੍ਰਤਪਾਲ ਸਾਰੇ ਲੋਕ ਵਿੱਚ ਸਾਰਿਆਂ ਦੀ ਪ੍ਰਤਪਾਲ ਕਰਨ ਵਾਲਾ ਹੈ ਜਦੋਂ ਧਰਨ ਮਾਇ ਆਕਾਸ਼ ਪਿਆਲ ਆ ਜਾਂਦਾ ਮਾਨਸ ਦੇ ਤਰ ਤਰੇ ਟੇਜਾਂ ਹਿਲਦੇ ਤੇ ਉਹ ਸਰਬ ਲੋਕ ਦੀ ਪ੍ਰਤਪਾਲ ਕਰਨ ਵਾਲਾ ਹੁੰਦੇ ਨੇ ਉਹ ਸਾਰੇ ਸਾਤ ਗੰਡਾਲੇ ਇਹੀ ਨੇ ਸਾਰੇ ਕੋਣ ਹੈ ਤਲਨ ਆਕਾਸ਼ ਪਿਆਰਨੇ ਨੇ ਜਿਹਦੇ ਹਿਰਦੇ 'ਚ ਬੁਝ ਚਿੱਤ ਕੇ ਜਗਾ ਨੇ ਉਹ ਸਰਬ ਲੋਕ ਦੀ ਪਰਤ ਪਾੜਦਾ ਜਿਹਦਾ ਬੋਨਗਾ ਜੁੜਦਾ ਹੈ ਚਿੱਤ ਕਿਤੇ ਹੋਰ ਹੈ ਉਹ ਹੈ ਅਦਨਬੀ ਲੋਕ ਉਹ ਸ਼ੈਤਾਨ ਹੈ ਅੱਗ ਅੱਲੜਦਾ ਕੱਲਾ ਕਬਜ ਕਰਦਾ ਫਿਰਦਾ ਦੂਰ ਤੱਕ ਹਵਾ ਹੀ ਜਾਂ ਕੇ ਕੱਲਾ ਟੋਣ ਰੋਬਲੇ ਕਰਦਾ ਨਾ الله یوڑ کے کہا نا میں چندر بند کا بوجہ کر لو او کاش کر جادو کیا ہول والی جیب چلتا ہے نہ سستی دا سستی والا نے کاش کر لو دے اوتے نہیں ہے ہا ਅਕਤੀ ਦੇ ਵਿੱਚ ਛੱਲੇ ਵੀ ਜੀ ਹੁੰਦੇ ਨੇ ਬਣ ਪਰਣੀ ਪਰਬਤ ਪਰਬਤੀ ਲਫ਼ਜ਼ ਹੈ ਪਰਬਤੀ ਹੈ ਬਣ ਪਰਬਤ ਪਰਬਤੀ ਲਫ਼ਜ਼ ਨਾਲ ਨਤਦਲ ਉਹਦੇ ਜੇ ਆਪਾਂ ਕਹੀਏ ਪਰਬਤ ਹੈ 파ਦਮ ਬਣਦੀ 파ਦਮ ਹੈ ਤਰਣ ਵੀ 파ਦਮ ਪਰਬਤ ਵੀ 파ਦਮ ਤੇ ਇਹ ਅਸੋਜੀ ਹੈ ਜਿ ਆਪਾਂ ਪੜੀਏ ਕਿ ਬਾਣਾ ਤਰਣਾ ਪਰਬਤ ਹੈ 파ਦਮ ਪਰਬਮ 파ਦਮਮ जेड़े बड़े बड़े ਪਰਣ ਨੇ ਉਹ ਵੀ ਪਰਬ੍ਰਹਮ ਹੈ ਜਿਹੜੇ ਛੋਟੇ ਤਨਕਨ ਉਹ है ਪਰਬ੍ਰਹਮ ਹੈ ਜਿਹੜੇ ਪ੍ਰਹਾੜ ਨੇ ਉਹ ਫਿਰ ਤਾਂ ਅਲਥੇ ਹੋ ਜੂਗਾ ਬੜੀ ਤ੍ਰਿਣੀ ਪਰਵਤੀ ਹੈ ਪਰਬ੍ਰਹਮ ਇਹ ਪर्वਤ ਇਹ ਬਣ ਜੰਗਲ ਜਿੱਥੇ ਜੰਗਲ ਨੇ ਕੀ ਤੇ ਕਾਹੂ ਸਾਰੀ ਜਗਾਈ ਪਰਬ੍ਰਹਮ ਹੈ ਹੁਕਮ ਹੈ ਹੁਕਮ हरि जगह ब्रह्म बनी तिनी पार्वती है पारब्रह्म ब्रह्म, ब्रह्म है हर जगह तो पारब्रह्म के बिना ब्रह्म होते ही करूंगा पारब्रह्म ने ऐसे भेजा होया ब्रह्म ਨੂੰ ਉਥੇ ਹੀ ਉਹ ਨੂੰ ਅਕਲ ਦੇ ਰਿਹਾ ਬੈਠੇ ਜੈਸੀ ਆ ਗਿਆ ਜੈਸੀ ਅਕੇ ਜੈਸੀ ਆ ਰਿਹਾ ਪਰਮਾ ਮੈਂ ਐਸਾ ਕਰਮ ਕਰ ਰਿਹਾ ਉਹ ਉਥੇ ਬ੍ਰਹਮ ਜੜਾ ਬੈਠਾ ਹੈ ਬਾਣ ਦੇ ਵਿੱਚ ਬੈਠਾ ਹੈ ਚਾਹੇ ਬڑے ਦਰਖਤ ਤੇ ਚਾਹੇ ਚਾਹੇ ਛੋਟੇ ਰੁੱਖ ਤੇ ਚਾਹੇ ਚਾਹੇ ਸਰਪੰਥਰ ਦੇ ਵਿੱਚ ਕੀੜਾ ਆਗਿਆ ਦੇ ਵਿੱਚ ਹੈ ਸਾਰੀ ਜਗ੍ਹਾ ਉਹ ਆਗਿਆ ਉਹਦਾ ਕਰਮ ਆਗਿਆ ਦੇ ਉੱਤੇ ਆਗਿਆ ਤੋਂ ਬਿਨਾ ਕੋਈ ਕਰਮ ਨਹੀਂ ਹੈ ਜਦ ਆਗਿਆ ਵਾਲਾ ਕਰਮ ਆਉਦਾ ਫੁੱਟ ਕਿਵੇਂ ਹੋਗੇ ਉਹ ਜਿਹੜਾ ਕਰਮ ਆਗਿਆ 'ਚ ਕਰਨਾ ਸੀ ਉਹਦਾ ਫੁੱਟ ਪਾਪ ਸਾਡੇ ਚ ਮਿਲਦ ਹੋ ਗਿਆ ਉਹ ਤਾਂ ਆਗਾ ਦੇਣਾ ਜਿਹੜੇ ਸੁਪਨ ਬਾਬੂ ਸਾਡੇ ਦਾ ਸੁਪਨ ਬਾਬੂ ਦਾ ਸੁਪਨ ਬਾਬੂ ਕਿਥੋਂ ਕਰ ਲਿਆ ਨੂੰ ਫਿਰ ਸੋ ਕੌਣ ਪਾਣੀ ਬੈਸੰਤਰ ਮਾਹੀ ਚਾਰ ਕੁੱਟ ਦੇ ਵਿਸੇਸ ਮਾਹੀ ਕੌਣ ਪਾਣੀ ਬੈਸੰਤਰ ਬੋਲੇ ਕੌਣ ਪਾਣੀ ਆਵਾਲਾ ਕੌਣ ਪਾਣੀ ਨੇ ਆ ਕੌਣ ਕੀ ਹੈ ਕੌਣ ਕਿਤਾ ਹੈ ਜੇ ਤ ਹੈ ਤਾਂ ਪਾਉਣਾ ਹੈ ਪਾਣੀ ਹੈ ਰਾਮੂ ਨੇ ਜਿਹਨੂੰ ਕਹਿੰਨਾ ਹੈ ਪਾਣੀ ਜਿਹੜਾ ਭਵੀ ਹੈ ਨਾ ਇਹ ਜਲਤੇ ਤੇਰੇ ਪਰ ਬੜੂ ਸਾਜਿਆ ਜਿਹੜਾ ਮਾਇਆ ਦੇ ਵਿੱਚ ਆ ਬੋਲ ਇਹ ਪਾਣੀ ਰੂਪ ਜਿਹੜਾ ਚਿੱਤ ਹੈ ਉਹ ਪੌਣ ਰੂਪ ਪੌਣ ਰੂਪ ਕਹਿੰਨਾ ਪੌਣ ਨਿਕਲ ਗਈ ਪੌਣ ਰੂਪ ਪੌਣਾਂ ਕਹਿੰਦੇ ਪਾਣੀ ਕਿੱਥੇ ਗਿਆ ਇਹਨਾਂ ਪਾਣੀ ਪੌਣ ਦੇ ਸਮਝਦੇ ਹੁੰਦੇ ਹੂ ਪਾਣੀ ਦਾ ਪੌਣ ਕਿਵੇਂ ਗਾਇਬ ਹੋ ਸਕਦਾ ਪਾਣੀ ਹਵਾ ਦੇ ਵਿੱਚ ਗਾਇਬ ਹੋ ਜਾਂਦਾ ਮਨ ਵਿੱਚੇ ਹਵਾ ਦੇ ਸਮਾਗ ਪੌਣੇ ਰਹਿ ਜਾਂਦੀ ਹੈ ਰਾਜਾ ਨਾ ਕਰਦਾ ਫਿਰ ਹੁਣ ਪੌਣੇ ਸਾਹ ਲੈ ਰਹੀ ਹੈ ਹਵਾ ਨਾਲ ਹਵਾ ਹੀ ਫਿਚਰ ਹੈ ਗਿਆ ਹਵਾ ਦਾ ਵੈਕੂਮ ਹੁੰਦਾ ਨਾ ਵੈਕੂਮ ਪੈਦਾ ਕਰਦਾ ਅੰਦਰ ਤਾਂ ਆਉਂਦੀ ਹੈ ਉਧਰ ਉਧਰ ਵੈਕੂਮ ਹੈ ਵੈਕੂਮ ਨਾਲ ਹਵਾ ਖਿੱਚ ਲਈਏ ਜੇ ਰਕੂ ਦਲਾਂ ਹੁੰਦੇ ਆਪਖੀਤੀਏ ਪਿਛੇ ਵੱਤ ਪਰ ਹੁੰਦਾ ਤਾਂ ਉਤੇ ਉਹ ਵਿਛੜ ਜਾਂਦੀ ਹੈ ਦੁਆਈ ਸੁਣ ਜ ਨਹੀਂ ਜਾਂਦੀ ਨਾ ਪਾਉਣ ਚਿੱਤ ਨੂੰ ਪਾਉਣ ਰੂਪਾਂ ਪਾਉਣ ਰੂਪ ਹੋਏ ਜਾਵਣਗੇ ਕੂਬੀਰ ਕਹਿੰਦਾ ਨਾ ਪਾਉਣ ਰੂਪ ਹੋਏ ਜਾਵਣਗੇ ਇਹ ਸਾਚੇ ਤੋਂ ਪਵਨਾ ਅਡ ਹੋਈ ਹੋਈ ਆ ਆਕਾਸ਼ ਤੋਂ ਅਡ ਆਕਾਸ਼ ਖੜਾ ਪਾਉਣ ਰੂਪ ਹੋ ਕੇ ਜੱਲਿਆ ਤਾਣ ਰੂਪੋ ਕੇ ਜੀਵ ਜੜਾ ਡੋਲਣ ਲੱਗਿਆ ਮਕਾਸ਼ ਨਾਲ ਡੁੜਕੇ ਫਿਰ ਖੜਦਾ ਫਿਰ ਹੁੰਦਾ ਹੋਜੀ ਤਾਣ ਪਾਣੀ ਬਸੰਤਰ ਮਾਹੇ ਚਾਰ ਕੁੰਡ ਤੇ ਦਿਸੇ ਸਮਾਰੇ ਓਣ ਪਾਣੀ ਬੈਸੰਤਰ ਜਦੋਂ ਪੌਣ ਬਾਣੀ ਇਹ ਕਹੋ ਕਿ ਅੰਦਰ ਬੈਠ ਜਾਂਦੇ ਚਿਤ ਹੋ ਕੇ ਅੰਦਰ ਬੈਠ ਜਾਂਦੇ ਨੇ ਬੈ ਸੰਤਰ ਮਾਨੇ ਉਹ ਬੈ ਸੰਤਰ ਜਦੋਂ ਅੰਦਰ ਬੈਠ ਹੈ ਬੈ ਬੈਠੀ ਚੀਜ਼ ਦਾ ਨਾਮ ਹੈ ਬੈ ਸੰਤਰ ਅੰਦਰ ਬੈਠੀ ਹੈ ਉਹ ਜਦੋਂ ਇਹ ਦੋਏ ਅੰਦਰ ਗੁਫਤੋ ਕੇ ਬੈਹ ਜਾਂਦੇ ਨੇ ਨਾ ਫਿਰਦੇ ਨੇ ਕੌਣ ਕੌਣੀ ਕੌਣ ਪਾਣੀ ਇਕੱਠੇ ਹੋ ਕੇ ਇੱਕ ਜਗ੍ਹਾ ਇਹਦਾ ਉਹ ਪਾਣੀ ਦੀ ਪਾਣੀ ਦਾ ਵਿਯੋਧ ਨਹੀਂ ਰਹਿੰਦਾ ਪਾਣੀ ਦਾ ਵਿਯੋਧ ਖਤਮ ਹੋ ਜਾਂਦਾ ਤਾਂ ਮਨ ਦਾ ਵਿਯੋਧ ਖਤਮ ਹੋ ਜਾਂਦਾ ਨਾ ਪਾਣੀ ਪਾਣੀ ਪੌਣ ਦੇ ਨਾਲ ਸਕਦਾ ਪੌਣ ਪਾਣੀ ਜਿੱਦੀ ਰਹਤੀ ਬੈਠਾ ਦੇਖੋ ਜਦ ਵੀ ਖਤਮ ਹੋ ਪਾਣੀ ਨੂੰ ਪੌਣ ਸਕਉਂਦੀ ਆ ਹਵਾ ਥਲੇ ਮਾਜ਼ੋ ਪਾਣੀ ਦੇ ਕੋ ਜਦ ਜੇ ਬਾਹਰ ਆ ਜੇ ਪਾਣੀ ਹਵਾ ਨੂੰ ਜਜਵ ਨਹੀਂ ਕਰ ਸਕਦਾ ਹਵਾ ਪਾੜ ਨੂੰ ਜਜਵ ਕਰ ਦਿੰਦੀ ਹੈ ਕਿਉਂਕਿ ਪਾਣੀ ਪੈਦਾ ਹੀ ਹਵਾ ਤੋਂ ਹੋਇਆ ਹੈ ਜਦ ਤੇ ਤੇ ਜਲ ਹੋਏ ਕੋਣਾ ਤੇ ਜਲ ਹੋਏ ਜਲ ਬਣਿਆ ਹੀ ਤੌੜ ਦੇ ਕਿਉਂ ਜੈਤੇ ਉਪਜੀ ਟੈਨ ਬਣੀ ਜਿੱਥੋਂ ਕੋਈ ਚੀਜ਼ ਪੈਦਾ ਹੁੰਦੀ ਹੈ ਉਹਦੇ ਚਸਬੂਦੀ ਜਾਂ ਕੇ ਪਾਣੀ ਹਵਾ ਤੋਂ ਪੈਦਾ ਆਇਆ ਕਰਕੇ ਹਵਾ ਤੇ ਸਮਾਉਗਾ ਪਾਣੀ ਜਿ ਨਹੀਂ ਹਾਂ ਤਾ ਨਹੀਂ ਪਾਣੀ ਕੀ ਦੀ ਗੱਲ ਉਹ ਵੀ ਫਿਰ ਬੱਦਲਾ ਹੀ ਆਹ ਹੋਰ ਪਾਣੀ ਕੀ ਦੇਹ ਫਰੀਦਾ ਜੀ ਪਰ ਸਰੀਰ ਅੰਦਰਲਾ ਪਾਉਣ ਪਾਣੀ ਦਾ ਬਣਿਆ ਦੇ ਨਾਲ ਹੈ ਉਹ ਵੀ ਹੈ ਉਹ ਜਲਚਾ ਉਹ ਜਲਚਾ ਬੱਵੀ ਹੈ ਜਾਲੂਪ ਹੈ ਮਾਣਾ ਜੀ ਪਵਨ ਪਵਨ ਲਪਮਾ ਸੀ ਨਾ ਜਿੱਦ ਉਹਦਾ ਪਵਨ ਕਿਸਮ ਆਇਆ ਹੋਇਆ ਸਾਇਰ ਰਹਿ ਗਿਆ ਸਮਾ ਗਿਆ ਜੀ ਚਾਰ ਕੁੰਟ ਦਾ ਦਿਸੇ ਸਮਾਏ ਚਾਰ ਕੁੰਡ ਦਾ ਦਿਸੇ ਸਮਾਏ ਚਾਰ ਕੁੰਟਾ ਦੇ ਵਿੱਚ ਦਾਦੇ ਸ਼ਾਮਾ ਚਾਰ ਕੁੰਟਾ ਨੇ ਦਸ ਦਸਾਉਂਦੇ ਇਹ ਸਮਾਏ ਕੌਣ ਪਾਣੀ ਬੈ ਸੰਤਰ ਮਾਹੇ ਚਾਰ ਕੁੰਡ ਦੇ ਵਿੱਚ ਦੇ ਬੰਤਰਨ ਸਾਰੀ ਨੇ ਧਰਤੀਆਂ ਪਤਾਲ ਉੱਪਰ ਵੀ ਨੇ ਹੋਰ ਥੱਲੇ ਜੀਵ ਹੋ ਸਕਦੀਆਂ ਖਾਣੀਆਂ ਸਾਈਡਾਂ ਤੇ ਵੀ ਹੋ ਸਕਦੀਆਂ ਨੇ ਅੱਠ ਦਿਸ਼ਾਵਾਂ ਮੰਡੀਆਂ ਗਈਆਂ ਨੇ ਅੱਠ ਦਿਸ਼ਾਵਾਂ ਨੇ ਚਾਰ ਖੂਟੇ ਚਾਰ ਦਿਸ਼ਾਵਾਂ ਚਾਰ ਖੂਟੇ ਆਕਾਸ਼ ਪਤਾ ਅੱਠ ਅੱਠ ਦੇ ਉਹ ਬੰਦੀ ਹੁੰਦੀਆਂ ਗਗਲ ਦੀਆਂ ਗਗਲ ਦੀਆਂ ਅੱਠ ਦਿਸ਼ਾਵਾਂ ਹੁੰਦੀਆਂ ਨਾ 10 ਹੁੰਦੀਆਂ 10 ਦਿਸ਼ਾਵਾਂ ਹੁੰਦੀਆਂ ਤਾਂ ਇਸ ਉਹ ਕੱਲੇ ਦਾ ਨੂਨ ਗਗਨ ਆਕਾਸ਼ ਗਗਨ ਪਾਤਾਲ ਗਗਨ ਚੌਲ ਗਗਨ ਆਈਲੇ ਕੱਲਾ ਗਗਨ ਆ ਜਾਂਦਾ ਕੋਈ 10 ਸਾਬੂ ਕੱਠੀ ਨਹੀਂ ਆਉਂਦਾ ਹਾਂਜੀ ਇਸਤੇ ਪਿੰਨ ਨਹੀਂ ਕੋ ਉਠਾਓ ਗੁਰਪ੍ਰਸਾਦ ਨਾਨਕ ਸੁਖ ਪਾਓ ਇਸਤੇ ਪਿੰਨ ਨਹੀਂ ਕੋ ਉਠਾਓ ਹੈ ਨਹੀਂ ਜਿੱਥੇ ਹੈ ਹੁਕਮ ਦੇ ਬਿਨਾਂ ਤਾਂ ਕੋਈ ਜਗ੍ਹਾ ਹੈ ਹੀ ਨਹੀਂ ਹੱਜਾ ਹੁਕਮ ਵਿਆਪਕਾ ਇਸਤੇ ਕੋਈ ਜਗ੍ਹਾ ਨਹੀਂ ਹੈ ਕੋਈ ਹੱਦਾ ਨਹੀਂ ਜਿੱਥੇ ਜੀਵ ਨਾ ਹੋਵੇ ਬ੍ਰਹਮ ਨਾ ਹੋਵੇ ਬਾਣ ਤਰੇ ਪਰਵਤਿਨ ਹੈ ਪਾਰ ਕੋਈ ਇਹ ਹੀ ਬਾਣ ਹੈ pani hai purte hai ki suddh hai to kum sare hi hai guruprasad nan sukh pau guruprasad nan sukh pau gyan di kripa naal nan kena sukh prapt karna chahida hai gyan सुख vich sukh hai agyanta vich sukh nahi hai agyanta vich dukh hai gyan vich